ਜੇ ਲੋਕ ਮਹੱਲਾ ਪੰਜਵਾਂ ਨਰਕ ਘੋਰ ਬਹੁ ਦੁੱਖ ਘਣੇ ਅਕਿਰਤ ਕਣਾ ਕਾ ਥਾਨ ਕਿਨ ਪ੍ਰਭ ਮਾਰੇ ਨਾਨਕਾ ਕੋਏ ਹੋਏ ਮੂਏ ਹਰਾਮ ਸਸਥਾਰ ਨਾ ਹਸਥਾਰ ਹਾਂਜੀ ਇਹ ਨਰਕ ਘੋਰ ਕਾ ਦਵਾਰ ਨਰਕ ਦਾ ਮਤਲਬ ਹੈ ਆ ਜਿਹੜੀ ਬੁੱਧੀ ਹੁੰਦੀ ਹਸੀਗਾ ਉਹ ਥੱਲੇ ਥੱਲੇ ਜਾਈ ਜਾਂਦੀ ਹੈ ਉੱਤੇ ਦੂਜੀ ਉੱਠਦੀ ਫਿਰ ਆਪਾਂ ਤਾਂ ਆਲੂ ਪੈਦੀ ਹੈ ਇੱਕ ਦੂਆ ਨੂੰ ਦੇਖ ਕੇ ਦੁਦੀਆਂ ਦੀ ਵੜਿਆਈ ਵੱਲ ਇੱਕ ਦੂਆ ਨੂੰ ਦੇਖ ਕੇ ਦੁਦੀਆਂ ਦੀ ਤਰੱਕੀ ਵੱਲ ਧਿਆਨ ਚਲੇ ਜਾਂਦਾ ਆਤਮ ਧਿਆਨ ਦੀ ਜਾਂਦੇ ਦਾ ਵੰਜਣਾ ਸਾਖ ਕਰੋਧ ਦਾ ਵੰਜਣਾ ਹੈ ਹਾਏ ਦੇਖ ਰਹੇ ਆਪੋ ਪ੍ਰੈਕਟੀਕਲ ਦੇ ਵਿੱਚ ਫਿਰਦੇ ਵਜਦੇ ਨੇ ਇਧਰੋਂ ਅੱਛਾ ਇਹ ਤਾਂ ਇਦਾਂ ਨਹੀਂ ਆਉਂਦੇ। ਇਹਨਾਂ ਹਰ ਕੋਰ ਦਾ ਸੋਰਾ ਜਰੂਰ ਜਿਹੜਾ ਹੈਗਾ ਅਸਲ ਦੇ ਵਿੱਚ ਖੁਕਾ। ਇਹ ਇਸਤਰੀ ਦਾ ਖੁਕਾ ਦੋਇ ਕੋਈ ਗੱਲ ਹੈ। ਇਹ ਅਸਲ ਦੇ ਆ ਹਰ ਕੋਰ ਤੇ ਸਿੱਖਣ। ਲੈਣ ਤੋਂ ਮਗਰ ਸਿੱਖਣ। ਚੱਕਿਆ ਚੰਗੀ ਸਿੱਖਿਆ ਲੈਣਾ। ਚੱਕਿਆ ਮਾੜੀ ਜਾਂ ਚੰਗੀ ਥੋੜੀ ਹੈ। ਆਦਮ ਸਿੱਖਿਆ ਦੇਲ ਵਾਲੇ ਬਾੜੀ ਦੇ ਚੰਗੀ ਸਿੱਖਿਆ ਦੇਣ ਵਾਲਾ ਕੋਈ ਇਹ ਥਾਨ ਨੇ ਇਹਦੇ ਵਿੱਚ ਬਹੁਤ ਦੁੱਖ ਘੜਦੇ ਸੰਸਾਰ ਚ ਫਕਰ ਪਤਾ ਹੁੰਦਾ ਉਹ ਤੇ ਆਪਣੇ ਲਾਭ ਨੇ ਅਕਰਤ ਕਣ ਵਰਤੇ ਕਰਤ ਤਾ ਉਹ ਕੌਣ ਨਾਲ ਜਿਹੜਾ ਕੱਲ ਮਾਇਆ ਸੀ ਕਭੋ ਕੋਲਦਾ ਨਹੀਂ ਪੁੱਛਦਾ ਕਭ ਕਰਦਾ ਦੂਜਾ ਹੋਰ ਕਰਦਾ। ਦੁਖਸਾਨ ਨਾਲ ਕਭ ਕਰਦਾ ਥੈ ਜਿਹੜਾ ਅਰਥ ਦਾ ਕੰਮ ਕਰਦਾ ਸੀ। ਦੁਖਸਾਨ ਨਾਲ ਕਭ ਕਰਦਾ ਅਕਰਤ ਕਰਦਾ ਕਰਤ ਨਹੀਂ ਕਰਦਾ। ਅਕਰਤ ਕਰਨਾ ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਵੂਏ ਹਰਾਮ ਤਾਂ ਬੁਰਾ ਮਹਾਰੇ ਨਾਸਤਾ ਮਾਰੋਣਾ ਨੂੰ ਪੈਂਦੀ ਐ ਮਾਰਕਾ ਕੀ ਪੈਂਦੀ ਐ ਘੜੀਏ ਘੜੀਏ ਮਾਰੀ ਉਹ ਤਾਂ ਘੜ ਰਿਹਾ ਐ ਨਾ ਤੂੰ ਇਹਨਾਂ ਦੀ ਬੁੱਧੀ ਟੁੱਟੂ ਖੜਿਆ ਐ ਗਲਤ ਪਾਸੇ ਜਾਣ ਤੇ ਪਸੂਰਾਂ ਜਿਵੇਂ ਰੋਕੀਏ ਗਲਤ ਪਾਸੇ ਜਾਣ ਤੇ ਡੰਡਾ ਵੀ ਮਾਰਨਾ ਪੈਂਦਾ ਠੀਕ ਹੈ ਸਾਰੂ ਸੇ ਠੋਕਨ ਅਰੂ ਵੀ ਨਾ ਬੈਂਚਿਆ ਜਰਨ ਅਰੂਕੇ ਸ਼ਿਰਫ ਆ ਮਾਰੇ ਨਾਟਕਾ ਹੋਏ ਹੋਏ ਆ ਆਰਾਮ ਹੈ ਸਾਰੀ ਜ਼ਿੰਦਗੀ ਪਰੇਸ਼ਾਨ ਹੈ ਆਖਰ ਮਰ ਗਏ ਮਾਣ ਨੂੰ ਸਮਝ ਨਹੀਂ ਆਈ ਸਾਰੀ ਜ਼ਿੰਦਗੀ ਅਸੀਂ ਜੰਮੇ ਕਿਉਂ ਸੀ ਹੈਰਾਨੀ ਕੇ ਮਰ ਗਏ ਪਤਾ ਨਹੀਂ ਲੱਗਿਆ ਵੀ ਜਦੂ ਕਿਉਂ ਹੋਇਆ ਸੀ ਕਿਉਂ ਹੋਇਆ ਸਾਰੀ ਗੱਲ ਸੀ ਸਾਰਾ ਆਰਾਮ ਦੀ ਖੇਡ ਸਭ ਚੇਤੇ ਨਹੀਂ ਗਈ ਉਹਦੀ ਘਰਾਂ ਨੇ ਤੇ ਜੰਮੇ ਸੀ ਹੈਰਾਨੀ ਜੇ ਮਰ ਕੇ मोहल्ला पंचम अवखद सबे कीतिन निंदक का दारू नाहे आप पुलाए नानक पछ पछ जोंनी पाहे आ सब अवखद कालियां दवाइयां दारू के दवियां दवाइयां बोल रहे हो कोई दवाई असर नहीं ਇਹ ਤੋ ਸਮਝਾ ਲੋਰ ਨਸਰੂਦੀ ਸਮਝਦਾ ਆਪ ਭੁਲਾਏ ਨਾਨਕਾ ਪਚ ਪਚ ਆਪ ਖਲਾਇਆ ਹੈ ਰਤਕ ਅਸਲ ਦੇ ਵਿੱਚ ਉਹਦੇ ਆਪਣੀ ਬੁੱਧੀ ਦੇ ਹੀ ਭੁਲਾਇਆ ਹੋਇਆ ਉਹਦੇ ਆਪਣਾ ਜੀਲ ਪਚ ਪਚ ਜੋਨੀ ਪਾਹ ਬੁੱਢਾ ਆਸਾਂ ਛੋਟਾ ਹੋ ਜਾਂਦਾ ਜਦ ਤੱਕ ਛੋਟਾ ਹੋ ਜਾਂਦਾ ਜੁਨਾਂ ਦੇ ਵਿੱਚ ਫਿਰ ਜਾਂਦਾ ਤਈ ਜਦ ਅਤਾਰ ਦਾ ਕਠੀ ਜਾਂਦਾ ਗਿਆਨ ਦਾ ਅੱਛਾ ਅਰਜੂਨ ਵੀ ਜਾਂਦਾ ਫਾਇਟ ਫਾਇਟ ਜੁਰਦੀ ਕਾਉੜੀ ਮਹੱਲਾ ਪੰਜਵਾਂ ਤੁਸ ਦਿੱਤਾ ਪੂਰੇ ਸਤਿਗੁਰੂ ਹਰ ਤਨ ਸੱਚ ਖੁੱਟ ਸਭੰ ਦੇਸੇ ਮਿਟ ਗਏ ਜਮ ਕਾ ਭੋਟ ਸਤਿ ਅਕਾਲ ਤੁਹਾਨੂੰ ਇਹ ਤਾਂ ਹਰ ਤਰ੍ਹਾਂ ਦਿੱਤਾ ਦੋਖ ਦਿੱਤਾ ਅਖੁੱਤ ਜਦ ਕਿ ਕੋਈ ਬਿਲਕੁਲ ਨਹੀਂ ਕੋਈ ਸੀ ਠੀਕ ਹੈ ਸਭ ਆਪ ਦੇ ਸੇ ਬਿਟ ਗਏ ਫਿਰ ਜਿੰਨੀਆਂ ਸ਼ੰਕਾਾਂ ਬਣੀਆਂ ਸਾਰੀਆਂ ਦੂਰ ਹੋ ਗਈ ਕੋਈ ਸ਼ੰਕਾ ਰਹੀ ਹੋਈ ਨਹੀਂ ਅੰਦਰਸਾ ਸ਼ੰਕਾ ਨੂੰ ਕਹਿ ਦੇ ਜੰਪਾ ਪਾਓ ਛੋਟਾ ਜੰਮਕਾ ਦੇ ਦਾਰਸ਼ੀਓ ਵੀ ਛੁੱਟ ਗਏ ਸੰਤ ਤੋਂ ਨਾਮ ਪਦਾਰਥ ਮਿਲਿਆ ਹੈ ਜੀ ਹਾਂ ਮਿਲਣਾ ਸੀ ਗੁਰੂ ਤੋਂ ਮਿਲਿਆ ਨੇ ਮਿਲਣ ਨਾਲ ਹਾਂ ਹਾਂ ਚੌਥਾ ਬਧਾਰਥ ਹੈ ਹਾਂਜੀ ਠੀਕ ਹੈ ਜੀ ਕਾਮ ਕਰੋਧ ਬੁਰਾਈਆਂ ਸੰਗੀ ਸਾਧੂ ਟੁੱਟ ਸੱਚੇ ਦੂਜਾ ਸੇਵ ਦੇ ਹੋਏ ਮਰਸਣ ਬੁੱਟ ਕਾਮ ਕਰੋਧ ਬੁਰਾਈਆਂ ਆਮਨਾ ਕਰੋਧ ਤੇ ਬੁਰਾਈਆਂ ਨੇ ਜਿੱਤੀਓ ਸੰਤ ਸਾਧੂ ਟੁੱਟ ਇਹਦਾ ਸਾਧੂ ਦੇ ਰਾਣੇ ਟੁੱਟ ਗਿਆ ਦੀਆਂ ਸਾਧੂ ਦੀ ਸੰਤਤ ਕਰਕੇ ਟੁੱਟ ਗਿਆ ਸੀ ਇਹ ਪਹਿਲਾਂ ਟੁੱਟ ਗਿਆ ਸੀ ਉਹ ਪਦਾਰਥਾਂ ਨਾਲ ਟੁੱਟ ਗਿਆ ਸੀ ਤਾਂ ਚਮਕਾ ਭੌਤ ਨਹੀਂ ਸੀ ਟੁੱਟਿਆ ਟੁੱਟਿਆ ਉਹ ਜੋਰ ਸ਼ੰਖਾ ਹਾਂ ਸੀ ਉਹ ਜਿਹੜੇ ਬਿਨ ਸਤਗੁਰ ਤੇ ਬਿਨ ਸੱਚੇ ਤੇ ਸਾਚੇ ਬਿਨ ਜਿਹੜੇ ਹੋਰ ਕਿਸੇ ਦੀ ਸੇਵਾ ਦੇ ਸਾਚੇ ਜਿਹਦੀ ਸੇਵਾ ਕਰਦੇ ਬਿਨ ਉਹ ਕੀ ਜਗਾ ਕਰਦੇ ਮਾਇਆ ਦੀ ਸੇਵਾ ਕਰਦੇ ਸੱਚਾ ਕੋਈ ਨਹੀਂ ਸਤਿਗੁਰੂ ਨੂੰ ਪੁੱਜਦੇ ਨੇ ਦੇਵਾਂ ਨੂੰ ਪੁੱਜਦੇ ਤੇ ਇਹਦਾ ਦੀ ਪੂਜਾ ਦੀ ਕਰਦੇ ਦੀ ਪੂਜਾ ਕਰਦੇ ਠੀਕ ਹੈ ਜੀ ਨਾਨਕ ਕੋ ਗੁਰ ਬਖਸ਼ਿਆ ਨਾਮੇ ਸੰਗ ਜੁਟ ਨਾਨਕ ਨੇ ਇਹ ਬਖਸ਼ਿਸ਼ ਕੀਤੀ ਹੈ ਨਾਨਕ ਨੇ ਫਰਮਾਨ ਕੀਤਾ ਅਸਲ ਤੇ ਫਰਮਾਨ ਕੀਤਾ ਉਹੀ ਬਖਸ਼ਿਸ਼ ਨਾਨਕ ਨੂੰ ਜਦੋਂ ਦੱਸਿਆ ਹੁਕਮ ਕੀਤਾ ਉਹੀ ਬਖਸ਼ਿਸ਼ ਨਾਨਕ ਕੋ ਨਾਮੇ ਸੰਗੀ ਜੁਟ ਉਹਨਾਂ ਸੰਦੀ ਜੁਟ ਕੇ ਨਾਮ ਦੇ ਨਾਲ ਜੁੜ ਜਾ ਨਾਲ ਜੁੜ ਜਾ ਦੇ ਨਾਲ ਕੱਢ ਦੇ بس ਇਦੋਂ ਉੱਤੇ ਹੋਰ ਕੋਈ ਭਗਤੀ ਹੋ ਹੈ ਦੀ ਇਦੋਂ ਉੱਤੇ ਹੋਰ ਬਿਵਸਤਾ ਹੀ ਹੈ ਦੀ ਇਦੋਂ ਉੱਤੇ ਕੋਈ ਪ੍ਰਾਪਤੀ ਹੋ ਹੈ ਦੀ ਠੀਕ ਹੈ ਜੀ